शलोक मोहल्ला 5 पहला मरण कबूल जीवन की छाड़ आस ओ सबना की रेणु का तो आओ हमारे पास पहला वर्ड कबूल पहला वर्ड कबूल लड़ाईयां मान जीवन की छाड़ आस आ जीवन दे ਪਤਾ ਨੀ ਕਿੰਦੇ ਸਾਹ ਦੇ ਇਹ ਭੁੱਲ ਜਾ ਤੂੰ ਲੱਭੀ ਕਰਦੀ ਆ ਛੱਡ ਦੇ ਬੰਦ ਕਬੂਲ ਕਰ ਲੈ ਬੰਦ ਕਬੂਲ ਕੀਆ ਆਪਣੀ ਮਰਜ਼ੀ त्यागਣੀ ਮੰਨ ਲਈ ਬਸ ਆਪਣੀ ਮਰਜ਼ੀ त्यागਣੀ ਕਬੂਲ ਕਰ ਲੈ ਬਾਕੀ ਜੀਵਨ ਦੀ ਆ ਛੱਡ ਦੇ ਕਿ ਨਾ ਚਿਰ ਜੀਵਨ ਕਰਨਾ ਚਿਰ ਜੀਵਨ ਨਹੀਂ ਹੈ ਕੋਈ ਪਰਵਾਹ ਨਹੀਂ ਹੋ ਸਭ ਨਾਲ ਕੀ ਰਹਿਣ ਐਸੀ ਰਹਿਣ ਬਣ ਐਸਾ ਗਿਆਨ ਦੇ ਲੋਕਾਂ ਨੂੰ ਐਸਾ ਗਿਆਨ ਵੱਡ ਐਸੀ ਗੱਲ ਕਰ ਜੀ ਦੇ ਵਿੱਚ ਗਿਆਨ ਖੋਵੇ ਉਹ ਕੀ ਹੋਵੇ ਸਮਝ ਕੇ ਰਹਿਣ ਦਾ ਸਾਰਿਆਂ ਦੀ ਅੱਖ ਦਾ ਸਰਬੋਤਮ ਹੋਵੇ ਕਿਸੇ ਦੀ ਅੱਖ ਚ ਨਾ ਰੜਕੇ ਸਾਰਿਆਂ ਦੀ ਬੁੱਧੀ ਨੂੰ ਰੋਸ਼ਨੀ ਦੇਣ ਵਾਲਾ ਹੋਵੇ ਤਾਓ ਆਓ ਹਮਾਰੇ ਪਾਸ ਫੇਰ ਕਹਿੰਦੇ ਸਾਡੇ ਕੋਲੋਂ ਸਾਰਿਆਂ ਨੂੰ ਇੱਕੋ ਜਿਹਾ ਸਮਝ ਕੇ ਮੇਰੇ ਕੋਲ ਉਹ ਇਹ ਦੁਨੀਆ ਸਿੱਖਾ ਹਿੰਦੂ ਹੈ ਸਾਈ ਹੈ ਮੁਸਲਮਾਨ ਆ ਬ੍ਰਾਹਮਣ ਹੈ ਤੇ ਪੈਸਾ ਖਤਰੀ ਇਹ ਜਿਹੜਾ ਪਰਬੇ ਬਟਾ ਕੇ ਫਿਰ ਵੀਰੇ ਕੋਲੋ ਅੱਛਾ ਇਹ ਜਿਹੜਾ ਹੋ ਸਬਨਾ ਕੀ ਰੇਣ ਕਾ ਦਾ ਭਾਵੇਂ ਨਹੀਂ ਹੈ ਕਿ ਸਭ ਦੇ ਪੈਰਾਂ ਦੀ ਧੂੜ ਬਣੋ ਇਸ ਤਰ੍ਹਾਂ ਗੱਲ ਨਹੀਂ ਹੈ ਪੈਰਾਂ ਦੀ ਧੂੜ ਨੂੰ ਕੀ ਕਰੂਗਾ ਵੀ ਆਪਣੇ ਆਪ ਨੂੰ ਨਿਮਾਣਾ ਕਰੋ ਆਪਰੇ ਆਪ ਨੂੰ ਲਾਭ ਉਹਨੂੰ ਕੀ ਲਾਭ ਹੈ ਦਾ ਮਤਲਬ ਹੁੰਦਾ ਜਿਹੜੀ ਗੁਰਮੁਖ ਨੇ ਰੇਣੇ ਹੁੰਦਾ ਹੈ ਸਦਾ ਤੋੜ ਪੜੀ ਤੇ ਤੇਰੇ ਜਨੂ ਤੇਰੇ ਜਨੂ ਤੋੜ ਪੜੀ ਤੋੜ ਰੈਦੀ ਕਰਕੇ ਘਾਲਿਆ ਆਪ ਪਛਾਹੇ ਪਛਾਹੇ ਆਪਣਾ ਗਿਆਨ ਆਪਣਾ ਬੋਲ ਰਿਹਾ ਪੀਸ ਦਿੱਤਾ ਖਤਮ ਕਰਤਾ ਜਿੱਤ ਲਿਆ ਉਹ ਗਿਆਨ ਸਰੂਪ ਹੋ ਗਿਆ ਜਿਹਨੂੰ ਵੀ ਉਹ ਗੱਲ ਦੱਸੀ ਉਹਨੇ ਹੀ ਬਦਲੀ ਬੁਨੇ ਜਿਤਨਾ ਸੀ ਨਾ ਸਵਰ ਹੈ ਬੁਨੇ ਕਾਬੂ ਕਰਨਾ ਸੀ ਬੁਨੇ ਖੜਾਉਣਾ ਸੀ ਬੰਦਾ ਗਿਆ ਦਿੱਤਾ ਉਹ ਨੂੰ ਟਿਕਾਉਣ ਵਾਲਾ ਗਿਆਨ ਦਿੱਤਾ ਉਹ ਸੁਨਵਾ ਵਾਸਤੇ ਕੋਈ ਹੁੰਦਾ ਤੁਹਾਡਾ ਡੀ ਨਹੀਂ ਹੁੰਦਾ ਪਰ ਵੀ ਇੱਕ ਐਸ ਬਾਬੀ ਇੱਕ ਉਹ ਸੁਨਵਾ ਵਾਸਤੇ ਵੀ ਹੋਈ ਜਾ ਤੇ ਚਾਹੀਏ ਵਾਸਤੇ ਵੀ ਸਿੱਖਾਂ ਵਾਸਤੇ ਵੀ ਸਾਥ ਵਾਸਤੇ ਦੁਨੀਆ ਦੇ ਲੋਕਾਂ ਵਾਸਤੇ ਬਰਦੂ ਟਿਕਾਉਣ ਵਾਲਾ ਗਿਆਨ ਬਰਦੂ ਸ਼ਾਂਤੀ ਦੇਣ ਵਾਲਾ ਗਿਆਨ ਦੇ ਕੋਈ ਇਹ ਸਵਤ ਕੀ ਰਹਿਣ ਆਓ ਹਮਾਰੇ ਪਾਸ ਦਾ ਕੀਪਾ ਬਣਦਾ ਕਿਰੇ ਸਾਡੇ ਕੋਲ ਆ ਜਿੰਨਾ ਚਿਰ ਤੁਸੀਂ ਪਹਿਲੀ ਗਵਾਨਾ ਤੁਹਾਡੇ ਵਿੱਚ ਹੈ ਉਹਨਾਂ ਚ ਸਾਡੇ ਕੋਲ ਆਉਣ ਦੀ ਲੋੜ ਨਹੀਂ ਸੁਆਬ ਬਦਲ ਕੇ ਆਓ ਕਹਿਣ ਦਾ ਮਤਲਬ ਹੈ ਗੁਰਮੁਖਾੜਾ ਛੱਡ ਆਪਣਾ ਕੇ ਆਓ ਗੁਰਮੁਖਾੜਾ ਛੱਡ ਕੇ ਆਓ ਜਿਹੜਾ ਪਹਿਲਾਂ ਨਹੀਂ ਬੈਠਿਆ ਬਾਡੇ ਚ ਦਾ ਉਹਨੂੰ ਢੋਲੋ ਢੋਲ ਗਿਆਨ ਨੂੰ ਪਾਣਾ ਤੋਏ ਦਾ ਧੂਪ ਦੇ ਉਹ ਤੋਂ ਧੂਪੇ ਜਾਓ ਫੇਰ ਸਾਡੇ ਕੋਲ ਆਓ ਇਹ ਦਵੀ ਚੀਜ਼ ਪਾਉਣੀ ਹੈ ਅਸੀਂ ਦੁੱਧ ਪਾਉਣਾ ਤੁਹਾਡੇ ਕੋਲ ਹੋਰ ਪਾਇਆ ਹੈ ਠੀਕ ਹੈ ਜੀ ਏ ਮਾਰੂ ਰਾਗ ਦੀ ਡੈਫੀਨੇਸ਼ਨ ਹੈ ਇੱਕ ਤਰ੍ਹਾਂ ਦੀ ਹੈ ਜੀ ਮਾਰੂ ਰਾਗ ਠੀਕ ਹੈ ਜੀ ਕੀ ਮਾਰੂਗਾ ਸਭ ਕੁਝ ਮਾਰੂਗਾ ਬੁਰਾਈਆਂ ਨੂੰ ਮਾਰੂਗਾ ਮਾਤੇ ਉਹਨੇ ਅੱਲਾ ਥੋੜੀ ਮਾਰ ਲੀਰ ਜੀ ਦੇ ਵੀ ਇਹ ਦੋ ਪੰਨੇ ਤੋਂ ਬਾਅਦ 1105 ਪੰਨੇ ਤੇ ਦੋ ਸ਼ਲੋਕ ਹੈ ਜੀ ਸ਼ਲੋਕ ਕਬੀਰ ਗगन धमामा बाजीयो ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਆਪ ਦੂਜੇ ਨੂੰ ਤੇ ਉਹ ਦੂਸਰਾ ਸ਼ਲੋਕ ਹੈ ਜੀ ਸੂਰਾ ਸੋ ਪਹਿਚਾਨਨੀ ਹੈ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬ ਹੁਨਾ ਛੱਡੈ ਖੇਤ ਇਹ ਪੁਰਜਾ ਪੁਰਜਾ ਤੋਂ ਕੀ ਭਾ ਜੀ ਇਹਦੇ ਪੁਰਜਾ ਪੁਰਜਾ ਕੱਟ ਕੇ ਸੂਰ ਵੀ ਵਰਦੇ ਰਹੀ ਕਿਉਂਕਿ ਦੇ ਵਿੱਚ ਲੜਾਈ ਹੋਈ ਫਿਰ ਬਾਅਦ 'ਚ ਪੁਰਜਾ ਪੁਰਜਾ ਕੱਟ ਕੇ ਡਿਗੇ ਦੀ ਪਰ ਜਦ ਛੱਡ ਗਿਆ ਨਾ ਭਜੇ ਸੱਚ ਦੀ ਲੜਾਈ ਲੜੇ ਕੋਈ ਸਿੰਘ ਭਜਿਆ ਕਦੇ ਅੱਜ ਤੱਕ ਸੂਰ ਤੇ ਸੂਰਬੀਰ ਸਮਝਦੇ ਆ ਕਿ ਜਾਨਵਾਨ ਸਮਝਦੇ ਆ ਪਰ ਸੂਰਾ ਜਾਨਵਾਨ ਤੇ ਸੂਰਬੀਰ ਹੁੰਦਾ ਹੈ। ਕਾ ਮੂਰਖ ਸੂਰੇ ਡੀ ਹੁੰਦੇ। ਆਪਣੇ ਲੋਗ ਵਾਸਤੇ ਲੜਦਾ ਮੂਰਖ। ਇਹ ਧਾਰਮਿਕ ਜੰਗ ਦੇ ਵਾਲੀ ਸ਼ਾਰਾ ਜੀ। ਜੰਗ ਧਾਰਮਿਕ ਵੀ ਹੈ। ਛੇਪਾਸ਼ਾ ਦੇ ਡੋਏ ਜੰਗਾਂ ਕਿਤੇ ਸੱਚੀ ਤਾਂ ਉਹਨੂੰ ਬਚਾਉਣ ਵਾਸਤੇ ਲੜੇ ਡਿਫੈਂਸਿਵ ਜੰਮ ਕਰੇ ਆ ਕਿ ਜਿਹੜੇ ਸੱਚ ਦਾ ਪ੍ਰਚਾਰ ਕਰਨ ਵਾਲੇ ਦੇ ਉਰਦੂ ਦੂਏ ਲੋਕ ਖਤਮ ਨਾ ਕਰ ਦੇਣ ਉਹਨਾਂ ਨੂੰ ਬਚਾਉਣ ਵਾਸਤੇ ਲੜੇ ਸਿਰਫ ਬੁਰਿਆਂ ਨੂੰ ਮਾਰਨ ਵਾਸਤੇ ਨਾ ਲੜੇ ਨਾ ਨਾ ਬੁਰਿਆਂ ਨੂੰ ਉਪਦੇਸ਼ ਦੇਣ ਲਈ ਮਾਰਤੀ ਹਾਂ ਅਸੀਂ ਉਪਦੇਸ਼ ਨਾਲ ਮਾਰਦੇ ਹਾਂ ਸ਼ਬਦ ਨਾਲ ਮਾਰਦੇ ਹਾਂ ਸ਼ਬਦ ਮੇਰਾ ਮੇਰਾ ਫੁੱਲਜੀ ਹੈ ਔਰ ਮਾਰ ਕੇ ਜੀਉਂਦੇ ਕੱਲ ਲੜਦੇ ਨੇ ਜਿਹੜੇ ਮਾਰਦੇ ਨੇ ਉਹ ਜੀਉਂਦੇ ਵੀ ਕਰ ਲੈਂਦੇ ਨੇ ਸਤਗੁਰੂ ਨੂੰ ਕਿਉਂ ਬਾੜ ਜੀ ਤਾਂ ਮਾਰ ਕੇ ਜੀਉਂਦਾ ਕਰਦਾ ਠੀਕ ਹੈ ਜੀ ਇਹ ਸਾਡ ਸਾਕੇ ਜੁੜਾ ਕਰ ਸਕਦੇ ਆ ਉਹ ਹੋਰ ਲੈਵਲ ਦੀ ਗੱਲ ਹੈ ਹੋਰ ਲੈਵਲ ਦੀ ਗੱਲ ਦੇ ਸਾਰੇ ਸ਼ਲੋਕ ਕੀਤੇ ਆ ਇਹ ਸ਼ਲੋਕ ਦੁਬਾਰਾ ਨਹੀਂ ਆਉਂਦੇ ਕਿਤੇ ਵੀ ਇਹ ਇੱਥੇ ਹੀ ਦਰਜ ਹੈ ਪੰਨੇ ਤੇ ਦੋ ਸ਼ਲੋਕ ਇਕੱਠੇ ਦਰਜ ਆ ਨੂੰ ਕਹਦੇ ਨੇ ਅੱਛਾ ਜੀ ਉੱਪਰ ਲੱਥੇ ਕੌਣ ਵਿਚਾਰੀ ਦਰਗਾਹ ਜਨ ਲੜ ਸਕਿਆ ਇੱਧਰ ਜਿਆ ਜੋਧਾ ਮੇਤੋਂ ਭੱਜਿਆ ਫਾਰੂ ਕਹਿੰਦੇ ਲਗਾਰੇ ਡੂਟ ਅੱਛਾ ਤਾਂ ਦਮਾਮਾ ਵੀ ਵਰਤਿਆ ਇੱਥੇ ਆ ਜੀ ਗगन ਦਮਾਮਾ ਬਾਜੀਓ ਪਰਿਓ ਨਿਸ਼ਾਨੇ ਕਾਉ ਜੰਗ ਦਾ ਐਲਾਨ ਤੋਂ ਪਹਿਲਾਂ ਮਰੂ ਵਈਦਾ ਐਲਾਨੇ ਜੰਗ ਹੈ ਦੇ ਵਿੱਚ ਅੱਛਾ ਖੇਤ ਜੋ ਮੰਡਿਓ ਸੂਰਮਾ ਅਭ ਜੂਜਣ ਕੋ ਖੇਤ ਦੇ ਵਿੱਚ ਬਣ ਗਿਆ ਸੂਰਮਾ ਹੁਣ ਸਾਰੇ ਦੋ ਜੂਜਣ ਵਾਲੇ ਆਪਣੇ ਵਰਤੇ ਖੇਤ ਚ ਆਏ ਵੜਿਆ ਸਾਰੀ ਕਲਾ ਦਿਖਾਵੇ ਹਾਂ ਜਦ ਕੜਕਦੇ ਸਾਰੇ ਜੋਰ ਦਿਖਾ ਦੇਵੇਂ ਹੁਣ ਇੱਥੇ ਆ ਕੇ ਪਰ ਕਿਵੇਂ ਜਿੱਤਦੇ ਬਹੁਤ ਥੋੜੀ ਜਿਹੀ ਤਿਆਰੀ ਸਾਰੇ ਜੋਰ ਦਿਖਾਏ ਮੈਨੂੰ ਬੋਦੀ ਜਿੱਤਉਣਾ ਪਰ ਸਾਰੇ ਜੋਰ ਦਸਲੇ ਪੈਣੇ ਨੇ ਸਾਰੇ ਪੈਤਰੇ ਦਸਲੇ ਪੈਣੇ ਨੇ ਠੀਕ ਹੈ ਜੀ ਪਰ ਜੇ ਦੂਸਰਾ ਸ਼ਲੋਕ ਹੈ ਇਹਦੇ ਬਾਰੇ ਦੱਸੋ ਸੂਰਾ ਸੋ ਹੈ ਜੋ ਲੜੈ ਦੀਨ ਕੇ ਹਿਤ ਪੁਰਜਾ ਪੁਰਜਾ ਕੱਟ ਮਾਰੇ ਕਬਹੂ ਨਾ ਛੱਡੇ ਖੇਤ ਦੂਰਾ ਨੂੰ ਬੰਦਿਆ ਸੀ ਜਿਹੜਾ ਸੱਚ ਵਾਸਤੇ ਲੜੇ ਝੂਠ ਵਾਸਤੇ ਲੜੇ ਬਾਇਆ ਝੂਠੀ ਆ ਝੂਠਾ ਰਾਜ ਆ ਸੁਠਾ ਆਦਾ ਝੂਠੀ ਬਿੜਾਈ ਆ ਦੁਨੀਆ ਦੀ ਸੱਚ ਵਾਸਤੇ ਲੜੇ ਸੱਚ ਕਦੇ ਹਮਲਾਵਰ ਹੁੰਦੇ ਦੀ ਸਾਡਾ ਡਿਫੈਂਸ ਕਰਦਾ ਹੁੰਦਾ ਆਪਣਾ ਆਪ ਬਚਾਓ ਕਰਦਾ ਹੁੰਦਾ ਦੀਦ ਕੇ ਹਿੱਤ ਦੀਦ ਦੇ ਹਿੱਤ ਹਿੱਤ ਵਿੱਚ ਲੜੇ ਸੱਚ ਦੇ ਹਿੱਤ ਵਿੱਚ ਲੜੇ ਪੁਰਜਾ ਪੁਰਜਾ ਕੱਟ ਕੇ ਚਾਹੇ ਮਰ ਜੇ ਜੀਰੇ ਕੱਟ ਕੇ ਪਰ ਵਿਦਾਨ ਨਾ ਛੱਡੇ ਸੱਤੋ ਡਿੱਗੇ ਨਾ ਕੰਪਰੋਮਾਈਜ਼ ਨਾ ਕਰੇ ਕਿਸੇ ਨੇ ਤਾਂ ਪਰਵਾਹ ਨਹੀਂ ਕੀਤਾ ਜਿੱਤ ਉੱਪਰ ਲਾ ਕੇ ਕਦੇ ਕਿਸੇ ਨੇ ਕੀਤਾ ਆਹਾਂ ਚੱਲ ਗਿਆ ਨਹੀਂ ਕੀਤਾ ਸੋਪਣਾ ਖੇਤ ਨਹੀਂ ਛੱਡਿਆ ਠੀਕ ਪੰਜਵਾਂ ਮੂਆ ਜੀਵਨ ਪੇਖ ਜੀਵਨ ਮਰ ਜਾਣ ਜਿੰਨਾ ਮੁਹੱਬਤ ਇੱਕ ਸਿਓ ਤੇ ਮਾਨਸ ਪ੍ਰਦਾਨ ਮੂਆ ਜੀਵਨ ਪੇਖ ਪਹਿਲਾਂ ਤੂੰ ਕੋਈ ਭਲਿਆ ਹੋਇਆ ਜਿਹੜਾ ਜਿਉਂਦਾ ਹੋ ਗਿਆ ਹੋਵੇ ਉਹਦਾ ਦਰਸ਼ਨ ਕਰ ਉਹ ਲੱਭ ਜੋ ਮਰ ਚੁੱਕਿਆ ਸੀ ਉਹ ਗਿਆ ਬਾਅਦ ਚ ਜਿਉਂਦਾ ਉਹਨੂੰ ਦੇਖ ਪਹਿਲਾਂ ਕੋਈ ਲੱਭ ਲੈ ਉਹਦੇ ਕੋਲ ਉਹ ਮਰ ਜਾਣਾ ਸਿੱਖ ਤੇ ਤੂੰ ਜਿਉਂਦਾ ਕਦੇ ਮਰਿਆ ਸੀ ਜੇ ਪਹਿਨਾ ਤੈਨੂੰ ਮਰਿਆ ਹੋਇਆ ਜਿਉਂਦਾ ਹੋਇਆ ਨਹੀਂ ਮਿਲਦਾ ਤੈਨੂੰ ਵੀ ਪਤਾ ਲੱਗਣਾ ਤੈਨੂੰ ਲੱਣੀ ਦੀ ਉਹ ਹੀ ਤੈਨੂੰ ਦੱਸ ਸਕਦਾ ਸਮਝਾ ਸਕਦਾ ਵੀ ਬਰੀ ਜਿਉਂਦਾ ਹੈ ਮਰੀਦਾ ਫਿਰ ਇਹ ਜਿਉਂਦਾ ਹੋਈਦਾ ਉਹੀ ਗੁਰਬਾਣੀ ਜੀ ਦੱਸਿਆ ਹੋਇਆ ਜਿਹੜੇ ਜਿਉਂਦੇ ਵਰਦੇ ਨੇ ਮਰ ਕੇ ਜਿਉਂਦੇ ਹੋਣ ਉਹਨਾਂ ਨੇ ਦੱਸੀ ਸਕਦੇ ਨੇ ਜਿਹੜੇ ਲੱਭ ਲੈਂਦੇ ਨੇ ਜਿਸ ਨੂੰ ਮਿਲ ਜਾਂਦਾ ਕੋਈ ਜੇ ਮਿਲਦਾ ਹੀ ਨਹੀਂ ਜਿਉਂਦੇ ਜੇ ਕੋਈ ਵਰ ਮਿਲੇ ਮੂਹ ਜਵੰਦਾ ਪੇਖ ਜੇ ਕੋਈ ਮਰ ਕੇ ਜੀਂਦਾ ਹੋਇਆ ਤੁਹਾਨੂੰ ਮਿਲ ਜਾਂਦਾ ਹੈਗਾ ਤੇ ਤੁਸੀਂ ਵੀ ਜੀਉਦੇ ਵਰ ਸਕਦੇ ਹੋ ਜਾਣ ਲੈਂਦੇ ਹੋ ਜਿਉਂਦਾ ਹੈ ਮਰੀਦਾ ਠੀਕ ਹੈ ਜੀ ਉਹ ਤਾਂ ਜਾਣ ਚਾਹੁੰਦੇ ਕਿਵੇਂ ਮਰੀਦਾ ਹੈ ਕਿਆ ਜਾਣਾਂ ਕਿਵੇਂ ਮਰੀਦਾ ਹੈ ਮਰਨਾ ਹੋਏ ਠੀਕ ਹੈ ਜੀ ਜਿਨ੍ਹਾਂ ਮੁਹੱਬਤ ਇੱਕ ਸਿਓ ਤੇ ਮਾਨਸ ਪ੍ਰਧਾਨ ਇੱਕ ਉਹ ਤਾਂ ਸੱਚੇ ਦੀ ਮੁਹੱਬਤ ਸੱਚਨ ਵਾਲਾ ਹੈ ਉਹ ਮਾਨਸ ਪ੍ਰਧਾਨ ਨੇ ਦੂਈ ਮਾਇਆ ਨੂੰ ਮੁਹੱਬਤ ਨਹੀਂ ਹੁੰਦੀ ਏ ਤਾਂ ਫਿਰ ਆਪਾਂ ਨੂੰ ਜੋ ਐਸਜੀਪੀਸੀ ਦੇ ਪ੍ਰਧਾਨ ਹੈ ਉਹਨਾਂ ਵੀ ਸ਼ਲੋਕ ਦੱਸਣਾ ਚਾਹੀਦਾ ਹੈ ਜੀ ਸ਼ਲੋਕਾ ਦੇ ਦੇਣਗੇ ਪਰ ਤਾਲਾ ਥੋਤੀ ਰਹੂਗਾ ਹਾਂਜੀ ਸ਼ਲੋਕਾ ਵੀ ਦੇ ਦੇਣਗੇ ਦੱਸੋ ਜੀ 10000 ਰੁਪਿਆ ਵੀ ਉਹ ਕਹਿ ਦੇਣਗੇ ਵੀ ਕਰੋ ਇਹਨਾਂ ਨੇ ਕਿੰਨੀ ਖੋਜ ਕੀਤੀ ਹੈ ਫੱਟਾ ਲਾਉਤੀ ਜੀ ਇਹ ਗੁਰਮਤਿ ਦੇ ਪ੍ਰਧਾਨ ਹੈ ਉਹ ਗਾਂਹ ਮਨਮੁਖਤਾ ਦੇ ਪ੍ਰਧਾਨ ਹੈ ਠੀਕ ਹੈ ਉਹ ਵੋਟਾਂ ਨਾਲ ਪ੍ਰਧਾਨ ਬਣਦੇ ਆ ਇੱਥੇ ਮਰਨ ਕਬੂਲ ਕਰਨਾ ਪੈਂਦਾ ਠੀਕ ਹੈ ਸਰਕਾਰ ਦੇ ਦਫਤ ਪ੍ਰਧਾਨ ਪਰਮੇਸ਼ਰ ਪਰਚੇ ਪ੍ਰਧਾਨ ਪਰਚੇ ਪ੍ਰਧਾਨ ਪਰਚੇ ਪਾਵਰ ਤਰਗਾਉਣ ਉਹ ਹੀ ਲੱਗਦਾ ਦਰਸ਼ਨ ਬਾਦਸ਼ਾਹ ਨੇ ਜੋ ਪਾਵਰ ਦੀ ਰੀਤ ਆਸ ਲੋਕਾਂ ਤੋਂ ਹੀ ਪਤਾ ਲੱਗਦਾ ਕਿ ਇੱਥੋਂ ਗੱਲ ਸ਼ੁਰੂ ਹੋਈ ਹੈ ਇਤੋਂ ਹੀ ਚਲਾਈਏ ਇੱਥੇ ਮਰਿਆ ਠੀਕ ਹੈ ਜੀ ਮਹੱਲਾ ਪੰਜਵਾ ਜਿਸ ਮਨ ਪਾਰ ਬ੍ਰਹਮ ਨਿਕਟੀ ਨਾ ਆਵੇ ਪੀਰ ਧੁਖ ਤਿਖ ਤਿਸ ਨਾ ਵਿਆਪਈ ਜਮ ਨਾਹੀ ਆਵੇ ਨੀਰ ਜਿਸਮਨ ਵਸੇ ਪਾਲਪਨ ਜਿਹੜੇ ਬੰਦੇ ਵਿੱਚ ਪਾਲਪਨ ਵਸ ਧਨਵਾਸ ਹੋ ਜਵੇ ਟਿਕਟ ਨਾ ਆਵੇ ਪੀਰ ਪੀੜਾ ਦੁੱਖ ਤਕਲੀਫ ਉਹਦੇ ਡੇੜੇ ਵਧੀ ਹੁੰਦੀ ਧੁਖ ਤਿਖ ਤਿਸ ਨਾ ਵਿਆਪੀ ਨਾ ਧੁਖ ਨਾ ਤਰੇ ਉਹਨੂੰ ਵਿਆਪਦੀ ਹੋ ਜੀ ਕਹਿੰਦੇ ਆਵੇ ਦੀ ਜੰਮ ਡੇੜੇ ਦੀ ਹੁੰਦਾ ਉਹਦੇ ਪਰਪ ਡੇੜੇ ਦੀ ਹੁੰਦਾ ਪਰ ਉਹਨੂੰ ਘੂਦਾਈ ਦੀ ਕੋ ਕਰ ਤਿੱਖ ਮਾਇਆ ਦੀ ਨੇੜੇ ਨਹੀਂ ਆਉਂਦੀ ਹਾਂ ਜੀ ਉਹ ਮਾਇਆ ਤੇ ਤ੍ਰਿਸ਼ਨਾ ਦੀ ਭੁੱਖ ਠੀਕ ਹੈ ਮਨ ਦੀ ਗੱਲ ਹੈ ਪਰ ਇਹ ਤਾਂ ਨਹੀਂ ਵੀ ਬਾਹਰਲੇ ਸਰੀਰ ਨੂੰ ਤਾਂ ਭੁੱਖ ਵਰਤਿੱਖ ਲੱਗੂ ਉਹ ਤਾਂ ਚਲੋ ਬਾਹਰਲੇ ਦੀ ਤਾਂ ਗੱਲੇ ਦੀ ਕਰਦੀ ਗੁਰਬੰਦੀ ਹਾਂਜੀ ਤਾਂ ਕਿਤੇ ਕਿਤੇ ਮਿਸਾਲ ਬਾਹਰਲੇ ਦੀ ਦੇ ਦਿੰਦੀ ਠੀਕ ਹੈ ਜੀ ਤੇ ਇਹਨਾਂ ਸਮਝ ਲੈਣ ਵੀ ਜਿਹੜੇ ਪਾਣੀ ਬਿਨਾਂ ਅੰਨ ਤੋਂ ਜੀਂਦੇ ਆ ਆਪਾਂ ਤਾਂ ਇਹ ਗੱਲ ਕਰ ਰਹੇ ਕਾਨੂੰਨ ਜੇ ਹੁੰਦਾ ਮੇਰੇ ਪਾਣੀ ਤੋਂ ਬਿਨਾਂ ਦੱਸੋ ਉਹ ਤਾਂ ਵੀ ਪਖੰਡਵਾ ਦੇ ਆਂ ਤੇ ਉਹਨਾਂ ਦੇ ਅੰਦਰ ਭੁਗਤਿਕ ਦੀ ਮਾਇਆ ਜਿਆਦਾ ਠੀਕ ਹੈ ਜੀ ਔੜੀ ਕੀਮਤ ਕਹਿਣ ਨਾ ਜਾਈਏ ਸਚ ਸ਼ਾਹ ਅਡੋਲੇ ਸਿੱਧ ਸਾਧਕ ਗਿਆਨੀ ਧਿਆਨੀਆਂ ਕੌਣ ਤੁਧ ਕੀਮਤ ਕਹਿਣਾ ਚਾਹੀਆ ਤੇਰੀ ਕੀਮਤ ਤਾਂ ਦੱਸੀ ਨਹੀਂ ਜਾ ਸਕਦੀ ਸੱਚਾ ਅਡੋਲੋ ਇਹ ਸੱਚੇ ਛਾੜੋ ਨੋ ਅਡੋਲ ਲੈ ਛਾੜੋ ਲੜਵਾਲੇ ਸੱਚੇ ਛਾ ਤੇਰੀ ਕੀਮਤ ਨਹੀਂ ਦੱਸੀ ਜਾ ਸਕਦੀ ਸਿੱਧ ਸਾਕ ਗਿਆਨੀਆਂ ਸਤਕਾ ਸੱਦਾ ਨੇ ਸਾਧਕਾਂ ਨੇ ਗਿਆਨੀਆਂ ਨੇ ਗਿਆਨੀਆਂ ਨੇ ਕਾਣ ਤਦ ਤੋਲੋ ਕਿਹੜਾ ਕੀਨੇ ਤੈਨੂੰ ਤੋਲੇ ਤੈਨੂੰ ਕੌਣ ਤੋਲ ਸਕਦਾ ਤੋਲੇ ਤੈਨੂੰ ਕੌਣ ਸਭ ਨੇ ਬੇਅੰਤ ਬੇਅੰਤ ਕਹਿ ਕੇ ਖੜਾ ਛੜਾ ਲਿਆ ਹੱਥ ਖੜੇ ਕਰਤੇ ਲੋਨੋ ਹੀ ਜਦ ਕਹਿਤਾ ਸਾਹ ਕਹਿਤਾ ਆਜ਼ਾਦ ਆਜ਼ਾਦ ਕਹਿਤਾ ਤੇ ਫਿਰ ਕੌਣ ਤੋਲੇ ਤੇ ਉਹਨੇ ਤਾਂ ਹੱਥ ਖੜੇ ਕਰਤੇ ਹੋਰ ਕੌਣ ਤੋਲੇ ਇਹ ਪਰਮੇਸ਼ਰ ਵਾਸਤੇ ਕਿਹਾ ਜੀ ਹਾਂ ਜੀ ਹਾਂ ਪਿੱਛੇ ਪਾਰ ਬ੍ਰਹਮ ਆਇਆ ਸ਼ਲੋਕ ਹੈ ਹੈ ਉਪਤ ਸਭ ਪਰਲੈ ਕਰਨ ਕਰਨ ਸਮਰੱਥ ਹੈ ਘਟ ਘਟ ਸਭ ਬੋਲੇ ਪੱਡੂ ਨਾਲ ਘੜ ਨੂੰ ਸੁਭਰਤਾ ਘੜ ਦੇ ਵੀ ਸੁਭਰਤਾ ਹੈ ਦੇ ਵੀ ਸੁਭਰਤਾ ਹੈ ਆ ਜਿਹੜੀ ਬੁੱਧੀ ਆ ਕਬੂਦ ਨੂੰ ਪੱਡ ਦਿੰਦਾ ਫਿਰ ਉਹਦੀ ਚੰਗੀ ਘੜ ਸੁਭਧ ਬਣਾ ਕੇ ਘੜ ਵੀ ਦਿੰਦਾ ਕਬੂਦ ਜਿਹੜੀ ਆਉਂਦੀ ਆ ਉਹਨੂੰ ਪੱਡ ਕੇ ਸੁਭਧ ਦੇ ਰੂਪ ਚ ਘੜ ਦਿੰਦਾ ਇਸ ਸੁਭਰਤਾ ਹੈ ਉਹ ਪੁੱਤ ਸਭ ਪੰਨ ਸਰੀਰਾਂ ਕਰਕੇ ਵੀ ਨਾ ਘੜਦਾ ਬੰਦਦਾ ਬੁੱਧ ਕਰਕੇ ਵੀ ਕਬੂਦ ਨੂੰ ਪੱਡ ਕੇ ਸੁਭਧ ਬਣਾ ਕੇ ਵੀ ਘੜ ਤੇ ਦਿੰਦਾ ਤੇ ਤੇ ਘਟ ਗਿਆ ਸੋਤ ਮਤਬੁਦ ਬੁੱਧ ਇਹ ਵੀ ਘਟ ਜਗਾਗਾਲੀ ਘਟ ਤੇ ਵੀ ਘਟਦਾ ਹੈ ਅ ਸਰੀਰਾਂ ਦੀ ਘਟ ਤੇ ਵੀ ਕਰਦਾ ਉਹ ਉਤਪਤੀ ਸਭ ਪਰਲੇ ਪਰਲੋ ਉਤਪਤੀਆਂ ਪਰਲੇ ਤੋਂ ਇਹ ਕਰਦਾ ਪਰਲੇ ਸਾਰਾ ਕੁਝ ਖਤਮ ਉਤਪਤੀ ਸਾਰਾ ਕੁਝ ਪ੍ਰਗਟ ਕਾਰਨ ਕਾਰਨ ਸਭ ਦਾ ਸਭ ਬੋਲਦਾ ਸਭ ਕੁਝ ਕਰਨ ਦੇ ਔਰ ਕਾਰਨ ਦੇ ਸੁਭਰਾਤ ਉਹ ਸਾਰਿਆਂ ਦੇ ਅੰਦਰ ਬੋਲਦਾ ਸਭ ਘਟ ਰਹਾ ਬੋਲਦਾ ਕਾਟ ਕਾਟ ਸਭ ਬੋਲ ਸਾਰਿਆਂ ਦੇ ਉੱਤੇ ਬੋਲਦਾ ਹੈ ਸੋ ਜੀ ਰਿਜਕ ਸਮਾਹੇ ਸਭ ਸਹਿ ਮਾਨਸ ਡੋਲੇ ਗਹਿਰ ਗੰਭੀਰ ਅਥਾ ਤੂੰ ਗੁਣ ਗਿਆਨ ਅਮੋਲ ਹੈ ਰਿਜਕ ਸਮਾਹੇ ਸਭ ਸਾਰਿਆਂ ਨੂੰ ਰਿਜਕ ਦੇਦੇ ਪੁਜਾਰੇ ਹੈ ਕਿਆ ਮਾਨਸ ਡੋਲ ਹੈ ਤੂੰ ਕੀ ਡੋਲਣਾ ਤੈਨੂੰ ਡੋਲਣ ਦੀ ਕਾੜੀ ਲੋੜ ਪਈ ਹੈ ਖੈਰ ਕਬੀਰ ਅਥਾ ਤੂੰ ਉਹ ਤਾਂ ਗਾਇਕ ਬੀਰਾ ਥਾਏ ਗੁਣ ਗਿਆਨ ਬੋਲੋ ਤੇਰਾ ਗੁਣ ਤੇਰੇ ਕੋਲੋਂ ਤੇਰਾ ਗਿਆਨ ਬੋਲ ਹੈ ਤੁਦੋ ਲਕ ਹੈ ਕੋਈ ਮੋਲ ਨਹੀਂ ਤੇਰੇ ਗੁਣ ਦਾ ਅਰਥ ਲੋ ਜੀ ਠੀਕ ਹੈ ਜੀ ਤੁਹਾਨੂੰ ਪਤਾ ਲੱਗਦਾ ਕਿ ਪਰਮੇਸ਼ਰ ਗਿਆਨ ਸਰੂਪ ਹੈ ਠੀਕ ਹੈ ਜੀ ਸੋਈ ਕੰਮ ਕਮਾਵਣਾ ਕੀਆ ਤੁਰ ਮੋਲੈ ਤੁਦੋਂ ਬਾਹਰ ਕਿਛ ਨਹੀਂ ਨਾਨਕ ਗੁਣ ਬੋਲੈ ਸੋਈ ਕਦ ਕਮਾਵਣਾ ਕੀ ਆ ਤੌਰ ਬੋਲ ਲੈ ਤਾਂ ਤੌਰੋਂ ਕੀ ਹੈ ਮਹੌਲਾ ਪਰਮੇਸ਼ਰ ਨੂੰ ਕੀ ਹੋਇਆ ਅੱਛਾ ਉਹ ਜੋ ਤੂੰ ਖੇਡ ਵਰਤਾ ਰਿਹਾ ਹੈ ਉਹੀ ਕਰ ਰਿਹਾ ਹੈ ਸਾਰੇ ਤੇਰਾ ਹੀ ਪਾਣਾ ਜਿਹੜਾ ਹੈ ਤੇਰਾ ਪਾਣਾ ਹੈ ਉਹ ਉਹਦੇ ਵਿੱਚ ਚੱਲ ਰਿਹਾ ਬਾਹਰ ਕੁਛ ਨਹੀਂ ਤੇ ਤੋਂ ਬਾਹਰ ਕੁਛ ਨਹੀਂ ਤੇਰੇ ਹੁਕਮ ਤੋਂ ਬਾਹਰ ਕੁਛ ਨਹੀਂ ਕੋਈ ਹੋ ਰਿਹਾ ਨਾ ਕੋਈ ਕਰ ਰਿਹਾ ਤੇਹੀ ਧਾਨ ਗੁਣ ਬੋਲੇ ਨਾਨਕ ਦੇਖਾ ਤੇਰੇ ਇਹ ਗੁਣ ਬੋਲੇ ਦੇ ਤੇ ਤੇਰੇ ਜੇ ਗੁਣ ਜੋ ਤੂੰ ਕਰਾਵੇਂ ਉਹੀ ਕਰਦੇ ਨੇ ਜਿਵੇਂ ਤੂੰ ਜਾਵੇਂ ਉਹੇ ਜਾ ਜਦੇ ਤੇਰੇ ਹੁਕਮ ਤੋਂ ਬਾਹਰ ਕੋਈ ਨਹੀਂ ਜਾ ਸਕਦਾ ਇਹ ਤੇਰੀ ਗੁਣ ਸਮਝ ਲੋ ਤੇਰੀ ਸ਼ਕਤੀ ਸਮਝ ਲੋ ਇਸ ਕਰਕੇ ਤੇਰੇ ਗੁਣ ਗਾਇਨ ਕਰਦਾ ਤੂੰ ਸਰਬੱਥ ਸਰਵਕਲਾ ਸਰਬੱਤ ਸੋਈ ਕੰਮ ਕਮਾਵਣਾ ਕੀਆ ਧੁਰਮੁਲ ਲੈ ਤੂੰ ਬਾਹਰ ਕਿਛ ਨਹੀਂ ਨਾਨਕ ਗੁਣ ਬੋਲੈ ਇੱਥੇ ਤੇਈਂ ਮੇ ਪੜੀ ਸਮਾਪਤੀ ਹੈ ਜੀ ਨਾਲੇ ਮਾਰੂ ਦੀ ਵਾਰ ਮਹੱਲਾ ਪੰਜਵਾਂ ਇਹਦੀ ਵੀ ਨਾਲੇ ਸਮਾਪਤੀ ਹੈ ਜੀ ਠੀਕ ਹੈ राग ਰਾਗ ਮਾਰੂ ਦੀਆਂ ਦੋ ਵਾਰਾਂ ਐ ਜੀ वारा ਵਾਰਾਂ ਦੇ ਵਿੱਚ ਮਾਰੂ ਰਾਗ ਦੀ ਕੋਈ ਡੈਫੀਨੇਸ਼ਨ ਨਹੀਂ ਆਪਾਂ ਨੂੰ ਸਪਸ਼ਟ ਹੋਈ ਪਰ ਉਦੇ ਵਿੱਚ ਮਾਰੂ ਰਾਗ ਬਾਰੇ ਇੱਕ ਸ਼ਲੋਕ ਦਰਜ ਹੈ ਜੀ ਜੀ ਮੈਂ ਸ਼ਲੋਕ ਪੜ੍ਹ ਦਿੰਨਾ ਜੀ ਆਪ ਜੀ ਦੇ ਅਰਥ ਕਰ ਦਿਓ ਜੀ ਜੀ ਗੁਰ ਕੈ ਸ਼ਬਦ ਅਰਾਧੀ ਹੈ ਨਾਮ ਰੰਗੀ ਬੈਰਾਗ ਜਿੱਤੇ ਪੰਜ ਬੈਰਾਈਆਂ ਨਾਨਕ ਸਫਲ ਮਾਰੂ ਇਹ ਰਾਗ ਗੁਰ ਸ਼ਬਦ ਅਰਾਧੀ ਹੈ ਗੁਰਬਾਣੀ ਦਾ ਉਪਦੇਸ਼ ਲਈਏ ਕੁਰਬਾਨਾ ਸ਼ਬਦ ਹੈ ਕੁਰਬਾਨਾ ਦਾ ਉਪਦੇਸ਼ ਕੁਰਬਾਨੀ ਦਾ ਉਪਦੇਸ਼ ਲੈ ਕੇ ਫਿਰ ਉਹ ਜੋ ਲੋਭ ਦਾ ਰੰਗ ਗੁਰਮਤਿ ਦੀ ਪ੍ਰਾਪਤੀ ਲੋਭ ਦਾ ਰੰਗ ਝੜੇ ਉਹਦੇ ਬਾਅਦ ਜਿਹੜੇ ਪੰਜ ਪੈਰਾਈ ਦੇ ਜਿੱਤੇ ਜਾਣ ਕੌਣ ਸਫਲ ਮਾਰੂ ਰਾਗ ਹੁੰਦਾ ਫਿਰ ਸਫਲ ਕਾਂਡੌੜ ਮਾਰੂ ਰਾਗ ਜਿਹੜਾ ਸ਼ੁਰੂ ਹੁੰਦਾ ਮਾਰੂ ਰਾਗ ਕੀ ਹੈ ਕੁਰਬਾਨੀ ਸਾਰਾ ਹੀ ਮਾਰੂ ਰਾਗ ਹੈ ਰਾਗ ਦਾ ਮਤਲਬ ਹੁੰਦਾ ਬੋਲਣਾ ਬੈਰਾਗ ਨੂੰ ਤੇ ਚੁੱਪ ਕਰ ਜਾਂਦਾ ਇਹ ਮਾਰੂ ਰਾਗ ਹੈ ਸਭ ਕੁਝ ਮਾਰ ਦਿੰਦਾ ਇਹ ਪਕਾਰਾਂ ਨੂੰ ਮਾਰ ਦਿੰਦਾ ਜੋ ਮਰਨ ਵਾਲੀ ਚੀਜ਼ ਹੈ ਮਰ ਜਾਂਦੀ ਹੈ ਜੋ ਅਵਰ ਚੀਜ਼ ਹੈ ਉਹ ਵੀ ਮਰਦੀ ਹੈ ਤੇ ਅਵਰ ਚੀਜ਼ ਨੂੰ ਛੱਡ ਕੇ ਨਾਮ ਨੂੰ ਛੱਡ ਕੇ ਸਭ ਕੁਝ ਮਾਰ ਦਿੰਦਾ ਠੀਕ ਹੈ ਜੀ ਗੁਰਕੇ ਸ਼ਬਦ ਅਰਾਧੀਏ ਨਾਮ ਰੰਗੀ ਬੈਰਾਗ ਦਾ ਰੰਗ ਵਾਲਾ ਬੈਰਾਗ ਹੁੰਦਾ ਨਾਮ ਦੇ ਰੰਗ ਚੜਦਾ ਹੈ ਬੈਰਾਗ ਹੈ ਪੈਰਾਗਨ ਹੋ ਲੋ ਮਾਇਆ ਦੀ ਚੜ੍ਹ ਜਾਂਦਾ ਨਾਮ ਦੀ ਭੁੱਖ ਜਾਗ ਜਾਂਦੀ ਹੈ ਆਰਾਧਨਾ ਕਰਕੇ ਜਾਂ ਨਾਮ ਨੂੰ ਮਿਲਦਾ ਜਾਂ ਬੋਲਦਾ ਫਿਰ ਬਾਹੂ ਰਾਵ ਹੁੰਦਾ ਹੈ ਇਹ ਗੁਰਬਾਣੀ ਸਾਰੇ ਬਾਹੂ ਰਾਵ ਆ ਗਿਆ ਹੈ ਇਹ ਬਾਹੂ ਰਾਗ ਆ ਜਾਂਦੇ ਨੇ ਕਿਉਂ ਜਿਹੜਾ ਨਾਮ ਹੈ ਇਹ ਸਾਰੀ ਉਹ ਦਾ ਅੰਤ ਕਰ ਦਿੰਦਾ ਹੈ ਸ਼ਕਲ ਕੇਵਲ ਹਰਗੋਹ ਹਰ ਨਾਮ ਮਤਾਂ ਦਾ ਅੰਤ ਕਰਦਾ ਮਾਰਦਾ ਹੈ ਦਾ ਨਾਸ ਕਰਦਾ ਇਹ ਰਾਗ ਮਾਰੂ ਹੈ ਕੁਰਬਾਨੀ ਸਾਰੀ ਉਹ ਬਕਾਨਾ ਨਾਸ ਕਰਦੀ ਹੈ ਅੰਤ ਕਰਦੀ ਹੈ ਉਹਦਾ ਝੂਠ ਕਪਟ ਫਰੇਬ ਡੰਗਾ ਕਰਦੀ ਹੈ ਇਸ ਰਾਗ ਹੈ ਥਾਰੇ ਜਦ ਕਿ ਉਠਾ ਮਨ ਦੇ ਵਿੱਚ ਝੂਠ ਕਪਟ ਮਰਦਾ ਵੱਧੀ ਵਰਦਾ ਸੱਤ ਸਰੂਪ ਮੰਦਾ ਵੱਜ ਜਾਂਦਾ ਤੇ ਝੂਠ ਸਰੂਪ ਹੈ ਉਹ ਮਾਰਿਆ ਜਾਂਦਾ ਵਾਇਦੀ ਦੀ ਭੁੱਖ ਮਾਰੀ ਜਾਂਦੀ ਹੈ ਨਾਲ ਦੀ ਭੁੱਖ ਪੈਦਾ ਹੋ ਜਾਂਦੀ ਹੈ ਠੀਕ ਹੈ ਜੀ ਜੀਤੇ ਪੰਜ ਬਹਿਰਾਈਆਂ ਨਾਨਕ ਸਫਲ ਮਾਰੂ ਇਹ ਰਾਗ ਪੰਜੇ ਸਫਲ ਰਾਗ ਹੋ ਗਿਆ ਸਫਲ ਮਾਰੂ ਤਾਂ ਹੋਰ ਕਿਸੇ ਵੀ ਰਾਗ ਦੇ ਨਾਲ ਕਾਮ ਕ੍ਰੋਧ ਲੋਭ ਕਾargy ਜਿੱਤੇ ਜਾ ਸਕਦੇ ਇਸ ਰਾਗ ਨਾਲ ਗੁਰਬਾਣੀ ਦੇ ਸ਼ਬਦ ਨਾਲ ਉਪਦੇਸ਼ ਨਾਲ ਗੁਰਬਾਣੀ ਨੂੰ ਸਮਝ ਕੇ ਗਾਇਨ ਕਰਨ ਨਾਲ ਪੰਜੇ ਵਿਕਾਰ ਜਿੱਤੇ ਜਾ ਸਕਦੇ ਨੇ ਪੰਜੇ ਵਿਕਾਰਾਂ ਨੂੰ ਜਿੱਤਣ ਦੀ ਸਫਲਤਾ ਪ੍ਰਾਪਤ ਹੋ ਸਕਦੀ ਹੈ ਕੀ ਕਹਿੰਦੇ ਇੱਥੇ ਸੋਰਠ ਰਾਗ ਦੀ ਗੱਲ ਵੀ ਹੋਈ ਹੈ ਵੈਸੇ ਇਸੇ ਤੋਂ ਇੱਕ ਸ਼ਲੋਕ ਅੱਗੇ ਜਲ ਸੋਰਠ ਸੋਰਸ ਪੀਜੀ ਹੈ ਕਬਹੂ ਨਾ ਫੀਕਾ ਹੋਏ ਨਾਨਕ RAM ਨਾਮ ਗੁਣ ਗਾਈਐ ਦਰਗਾ ਨਿਰਮਲ ਸੋਈ ਸੋਰਠੜ ਨੂੰ ਸਿਆਰੀ ਹੈ ਕੋਕੜ ਨਹੀਂ ਜੀ ਸਿਆਰੀ ਹੈ ਸੋਰਠੀ ਬੁੱਧੀ ਹੈ ਬੁੱਧੀ ਰਾਠ ਹੈ ਇਹਦੀ ਪਿੱਛੇ ਬੁੱਧੀ ਹੁਣ ਵੇਖ ਬੁੱਧੀਆ ਸੋਰਟੀ ਉਹ ਜਿਹੜੀ ਹਟੇਲੀ ਸੀ ਨਾ ਹਟੇ ਨਹੀਂ ਦਾ ਨਾਮ ਤੋਂ ਪਿੱਛੇ ਡਿਗੀ ਨਹੀਂ ਨਾ ਪਿੱਛੇ ਨਹੀਂ ਹਟੀ ਬਹੁਤ ਕਪੂਰਲੀ ਸੀ ਉਹਨੇ ਰਸ ਪੀਤਾ ਸੋਰਟੀ ਸੋਰ ਰਸ ਪੀਜੀ ਹੈ ਉਹਨੇ ਨਾ ਰਸ ਪੀਤਾ ਜਿਹੜੀ ਦੁਜਿ ਤੇਜ ਰਗੀ ਉਹਨੇ ਕੀ ਪੀਣਾ ਸੀ ਤੇ ਤਿਆਗ ਕੇ ਹੀ ਸੋਰਟੀ ਹੈ ਠੀਕ ਰਸ ਪੀਤੀ ਹੈ ਨਾ ਫੀਕਾ ਹੋਏ ਉਹ ਬਵੇਦ ਦਾ ਰਣ ਕਦੋਂ ਫਿੱਟਾਉਣ ਵਾਲਾ ਪੌਲੀ ਫਿੱਟਾਉਦਾ ਠੀਕ ਹੈ ਜੀ ਨਾਨਕ ਰਾਮ ਨਾਮ ਗੁਣ ਗਾਈਏ ਦਰਗਾ ਨਿਰਮਲ ਸੋਈ ਆ ਫਿਰ ਕੀ ਕਰੀਦਾ ਰਾਮ ਰੋਗ ਗੁਣ ਕਾਹਨ ਕਰੀਦਾ ਦਰਗਾ ਨਿਰਮਲ ਸੋਈ ਸੋਭਾ ਜੜੀ ਹੈ ਐਸੀ ਸੋਭਾ ਕੀਤੀ ਹੋਈ ਦਰਗਾ ਦੇ ਵਿੱਚ ਦਿਰਵਨ ਪਰਵਾਨ ਹੁਸੀਆ ਦਰਗਾ ਇੱਥੇ ਦਿਰਵਨ ਵਤੀ ਜਾਂਦੀ ਹੈ ਆਇਆ ਦੀ ਹੁੰਦੀ ਹੈ ਮਾਇਆ ਦੀ ਸੋਪਾੜੀ ਹੁੰਦੀ ਜਿਹੜਾ ਕੋ ਉਪਜਿਆ ਹੈ ਦੀ ਸੋਪਾੜੀ ਹੈ ਮਾਇਆ ਦੀ ਸੋਪਾੜੀ ਨਹੀਂ ਹੈ ਠੀਕ ਹੈ ਜੀ ਇੱਥੇ ਸ਼ਲੋਕ ਦੀ ਸਮਾਪਤੀ ਹੈ ਜੀ ਤੇ 12 ਤੋਂ ਬਧਿਕ ਵਿੱਚ ਪੰਜਵੇਂ ਮਹੱਲੇ ਦੇ ਜਿਹੜੇ ਸ਼ਲੋਕ ਦਰਜਾ ਉਹਨਾਂ ਵਿੱਚ ਦੋ ਸ਼ਲੋਕਾਂ ਵਿੱਚ ਇੱਕ ਵਿੱਚ ਰਾਗ ਮਾਰੂ ਦੇ ਬਾਰੇ ਗੱਲ ਹੋਈ ਹੈ ਦੂਏ ਵਿੱਚ ਰਾਗ ਸੋਰਠੀ ਇਹਦੇ ਬਾਰੇ ਗੱਲ ਹੋਈ ਹੈ ਜੀ ਕਤੋਂ ਕਮਾ ਕੇ ਅਰਥ ਦੋਹਲ ਦੇ ਕੋਈ ਹੈ ਹਾਂਜੀ ਘੁਮ ਕਮਾ ਕੇ ਉਹੀ ਗੱਲ ਹੈ ਜਿੱਤੇ ਪੰਜ ਬਹਿਰਾਈਆਂ ਨਾਲ ਗੁਰਬਾਣੀ ਪੜ੍ਹਨੀ ਦੀ ਸਫਲਤਾ ਇਹ ਹੀ ਹੈ ਕਿ ਪੰਜ ਜਿਹੜੇ ਬਹਿਰਾਏ ਹੈਗੇ ਬਹਿਰੀ ਇਹ ਜਿੱਤੇ ਜਾਣ ਹੈ ਜੀ ਇਹਦੇ ਨਾਲ ਜਿੱਤ ਉਹਦੇ ਨਾਲ ਹੋਰ ਕੋਈ ਤਰੀਕਾ ਨਹੀਂ ਹੋਰ ਕੁਝ ਵੀ ਗਾਈ ਜਾਓ ਠੀਕ ਹੈ